ਸਭ ਤੋਂ ਪਹਿਲਾਂ ਪੋਜਾਸਨ ਖੜੇ ਹੋ ਕੇ ਕਰਨ ਵਾਲੇ ਸ਼ੁਰੂ ਕਰ ਰਹੇ ਹਾਂ ਸਭ ਤੋਂ ਪਹਿਲਾਂ ਤਾੜਾਸ਼ਨ ਸ਼ੁਰੂ ਕਰ ਰਹੇ ਹਾਂ ਸਰੀਰ ਨੂੰ ਚੁਸਤ ਅਤੇ ਦੁਸਤ ਰੱਖਣ ਵਾਸਤੇ ਬਹੁਤ ਹੀ ਸਹਾਇੀ ਹੈ ਤਾੜਾਸ਼ਨ ਇਸ ਨਾਲ ਬੱਚਿਆਂ ਦਾ ਕੱਦ ਲੰਮਾ ਹੁੰਦਾ ਹੈ ਸਰੀਰ ਦੀ ਸੁਸ਼ਟੀ ਦੂਰ ਹੁੰਦੀ ਹੈ ਦੋਹਾਂ ਹੱਥਾਂ ਨੂੰ ਉਪਰ ਆਸਮਾਨ ਵੱਲ ਲੈ ਜਾਓ ਦੋਹਾਂ ਹੱਥਾਂ ਦੀਆਂ ਤੜੀਆਂ ਦਾ ਰੁੱਖ ਸਾਹਮਣੇ ਦੀ ਤਰਫ ਰਹੇਗਾ ਹੁਣ ਸਵਾਸ ਨੂੰ ਪਰਦੇ ਹੋਏ ਦੋਹਾਂ ਹੱਥਾਂ ਨੂੰ ਉੱਪਰ ਆਸਮਾਨ ਦੀ ਤਰਫ ਖਿੱਚ ਦਿਓ ਅਡੀਆਂ ਨੂੰ ਵੀ ਜ਼ਮੀਨ ਤੋਂ ਉਠਾ ਲਓ ਕੇਵਲ ਪੈਰਾਂ ਦੇ ਪੰਜੇ ਹੀ ਜ਼ਮੀਨ ਤੇ ਲੱਗੇ ਰਹਿਣਗੇ ਸਾਰੇ ਸਰੀਰ ਨੂੰ ਉੱਪਰ ਦੀ ਤਰਫ ਖਿੱਚ ਕੇ ਰੱਖੋ ਅਤੇ ਪੈਰ ਦੇ ਪੰਜਿਆਂ ਦਾ ਬੈਲੈਂਸ ਬਣਾਉਣ ਦਾ ਯਤਨ ਕਰੋ ਹੁਣ ਛੋਟੇ ਛੋਟੇ ਸਵਾਸ ਲੈਣੇ ਚਾਲੂ ਕਰ ਦਿਓ ਹੱਥਾਂ ਦੇ ਪੰਜਿਆਂ ਨੂੰ ਉਸੇ ਤਰ੍ਹਾਂ ਹੀ ਆਸਮਾਨ ਦੀ ਤਰਫ ਖਿੱਚ ਕੇ ਰੱਖੋ ਵਾਪਸ ਹੌਲੀ ਹੌਲੀ ਵਾਪਸ ਹੌਲੀ ਹੌਲੀ ਵਾਪਸ ਇੱਕ ਵਾਰ ਫਿਰ ਦੋਹਾਂ ਹੱਥਾਂ ਨੂੰ ਆਸਮਾਨ ਦੀ ਤਰਫ ਲੈ ਜਾਓ ਸਵਾਸ ਨੂੰ ਪਰਦੇ ਹੋਏ ਸਾਰੇ ਸੀ ਨੂੰ ਦੋ ਹੱਥਾਂ ਨੂੰ ਆਸਮਾਨ ਦੀ ਤਰਫ ਖਿੱਚ ਦਿਓ ਅਡੀਆਂ ਜ਼ਮੀਨ ਤੋਂ ਉਠ ਜਾਣ ਸੋਹਾ ਸੰਦਰ ਪਰਿਆ ਰਹੇ ਵਾਪਸ ਹੌਲੀ ਹੌਲੀ ਵਾਪਸ ਅਸੀਂ ਅਰਧ ਚੰਦਰਾਸਨ ਕਰਨ ਜਾ ਰਹੇ ਹਾਂ अर्ध चंद्र आसन ਕਰਨ ਨਾਲ ریڑھ دی ہڈی دے اندر لچک پیدا ہوندی ہے چھاتی تے پیٹھ دے روگاں لئی بہت ہی لایبند ہے گردے تے پیشاب سبندی روگاں لئی وی بہت ہی فائدہ مند ہے ای آسن अर्ध चंद्र आसन دوہاں پیراں دا فاصلہ 5 انچ کر لو دوہاں ہاتھاں نوں اوپر آکھمان دی طرف ਦੋਹਾਂ ਹੱਥਾਂ ਦੀਆਂ ਉਂਗਲੀਆਂ ਵਿੱਚ ਉਂਗਲੀਆਂ ਫਸਾ ਕੇ ਸਿਕੰਜਾ ਬਣਾ ਲਓ। ਤਲੀਆਂ ਦਾ ਰੁੱਖ ਆਸਮਾਨ ਦੀ ਤਰਫ ਕਰ ਲਓ। ਹੁਣ ਦੋਹਾਂ ਹੱਥਾਂ ਅਤੇ ਸਾਰੇ ਸਰੀਰ ਨੂੰ ਸਵਾਸ ਬਾਹਰ ਕੱਢਦੇ ਹੋਏ ਛੱਜੇ ਪਾਸੇ ਝੁਕਾ ਦਿਓ। ਵਾਪਸ ਸਵਾਸ ਅੰਦਰ ਲੈਣ ਵਾਪਸ ਫਿਰ ਸਿੱਧੇ ਹੋ ਜਾਓ ਹੱਥਾਂ ਨੂੰ ਇੱਕ ਵਾਰ ਫੇਰ ਆਸਮਾਨ ਵੱਲ ਲੈ ਜਾਓ ਦੋ ਹੱਥਾਂ ਨੂੰ ਆਸਮਾਨ ਦੀ ਤਰਫ ਖਿੱਚੋ ਦੁਬਾਰਾ ਫੇਰ ਸਵਾਸ ਨੂੰ ਉਬਾਰ ਕੱਢਦੇ ਹੋਏ ਸਾਰੇ ਸੀਨ ਨੂੰ ਖੱਬੇ ਪਾਸੇ ਝੁਕਾ ਦਿਓ ਵਾਪਸ ਹੌਲੀ ਹੌਲੀ ਵਾਪਸ ਦੁਆਤਾਂ ਨੂੰ ਇੱਕ ਵਾਰੀ ਫੇਰ ਅਸਮਾਨ ਦੀ ਤਰਫ ਖਿੱਚੋ ਹੁਣ ਸਾਹ ਨੂੰ ਫੇਰ ਬਾਹਰ ਕੱਢਦੇ ਹੋਏ ਸੱਜੇ ਪਾਸੇ ਚੁੱਕ ਜਾਓ ਵਾਪਸ ਹੌਲੀ ਹੌਲੀ ਵਾਪਸ ਹੁਣ ਫਿਰ ਸਾਹਸ ਨੂੰ ਬਾਹਰ ਕੱਢਦੇ ਹੋਏ ਖੱਬੇ ਪਾਸੇ ਚੁੱਕ ਜਾਓ ਵਾਪਸ ਸਿੱਧੇ ਹੋ ਜਾਓ ਹੁਣ ਸੱਜੇ ਪਾਸੇ ਆਪਣੇ ਸਾਹਸ ਨੂੰ ਬਾਹਰ ਕੱਢਦੇ ਹੋਏ ਚੁੱਕ ਜਾਓ ਪਾਪਾ ਹੁਣ ਦੋਹਾਂ ਹੱਥਾਂ ਦਾ ਸਕੰਝਾ ਖੋਲਦੇ ਹੋਏ ਸਾਈਡਾਂ ਤੋਂ ਦੋਵੇਂ ਹੱਥ ਥੱਲੇ ਲੈ ਆਓ ਹੁਣ ਕਰਾਂਗੇ ਕਟੀ ਚੱਕਰਾਸਨ ਰੀੜ ਦੀ ਦਰਦ ਲਈ ਮੋਟਾਪਾ ਕਬਜ ਅਤੇ ਸੀਂ ਦੀ ਚੁਸਤੀ ਲਈ ਲੱਤਾਂ ਤੇ ਬਾਹਾਂ ਦੀ ਦਰਦ ਲਈ ਬਹੁਤ ਹੀ ਲਾਭਕਾਰੀ ਹੈ ਇਹ ਕਟੀ ਚੱਕਰਾਸਨ ਦੋਵਾਂ ਬਾਹਾਂ ਨੂੰ ਸਾਹਮਣੇ ਫੈਲਾ ਲਓ ਪੈਰਾਂ ਦਾ فاਸਲਾ ਇੱਕ ਫੁੱਟ ਕਰ ਲੋ ਸਵਾਸ ਨੂੰ ਬਾਹਰ ਕੱਢਦੇ ਹੋਏ ਦੋਹਾਂ ਹੱਥਾਂ ਨੂੰ ਸੱਜੀ ਸਾਈਡ ਪਿਛਲੀ ਸਾਈਡ ਕੁੰਮ ਜਾਓ ਦੋਵੇਂ ਹੱਥ ਵੀ ਪਿੱਛੇ ਚਲੇ ਜਾਣਗੇ ਖੱਬਾ ਹੱਥ ਸੱਜੇ ਮੋਢੇ ਨਾਲ ਲੱਗ ਜਾਏ ਸੱਜੀ ਬਾਹ ਮੋਢੇ ਦੇ ਬਰਾਬਰ ਪਿੱਛੇ ਨੂੰ ਸਿੱਧੀ ਰਹੇਗੀ ਸਿਰ ਨੂੰ ਵੀ ਸੱਜੀ ਸਾਈਡ ਕਮਾ ਕੇ ਸੱਜੇ ਹੱਥ ਨੂੰ ਦੇਖਦੇ ਰਹੋ ਆਪਕੋ ਦੋਵੇਂ ਹੱਥ ਸਿੱਧੇ ਸਾਹਮਣੇ ਫੈਲਾ ਲਓ ਬਾਹਾਂ ਸਧੀਆਂ ਕਰ ਲਓ ਹੁਣ ਸਾਹ ਨੂੰ ਬਾਹਰ ਕੱਢਦੇ ਹੋਏ ਖੱਬੇ ਪਾਸੇ ਕੁਮ ਜਾਓ ਪੈਰ ਆਪਣੀ ਜਗ੍ਹਾ ਤੇ ਸਥਿਰ ਰਹਿਣਗੇ ਸਾਹਾਸ ਅੰਦਰ ਲੈਂਦੇ ਹੋਏ ਵਾਪਸ ਆਵਾ ਫਿਰ ਸਾਹਮਣੇ ਫੈਲਾ ਲਓ। ਸਾਹ ਨੂੰ ਬਾਹਰ ਕੱਢਦੇ ਹੋਏ ਫਿਰ ਸੱਜੇ ਪਾਸੇ ਕੁਮ ਜਾਓ। ਸਾਹ ਆਸਮ ਦਾ ਲੈਂਦੇ ਹੋਏ ਵਾਪਸ। ਉਹਨਾਂ ਸਾਹ ਨੂੰ ਬਾਹਰ ਕੱਢਦੇ ਹੋਏ ਖੱਬੀ ਸਾਈਡ ਪਿੱਛੇ ਕੁੰਜਾਓ ਸਜਾਹਤ ਖੱਬੇ ਮੋੜੇ ਨਾਲ ਲੱਗਾ ਰਹੇ ਸਾਰਾ ਸਰੀਰ ਖੱਬੇ ਪਾਸੇ ਮੁੜ ਜਾਏ ਸਿਰ ਕਮਾ ਕੇ ਖੱਬੇ ਹੱਥ ਨੂੰ ਦੇਖਦੇ ਰਹੋ ਵਾਪਸ ਹੁਣ ਦੋਵੇਂ ਹੱਥ ਥੱਲੇ ਲੈ ਆਓ